ਹਾਂਜੀ 23ਵਾਂ ਛੰਦ ਹੈ ਜੀ ਏ ਅਖੀਰੀ ਛੰਦ ਹੈਗਾ ਇਸ ਰਚਨਾ ਦਾ ਵੈਦਾਂ ਸੰਦਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਵੈਦਾਂ ਸੰਦਾ ਸੰਗ ਇਕੱਠਾ ਹੋਇਆ ਜੇ ਗੁਰਮਤ ਇਕੱਠੇ ਹੋ ਵੀ ਜਾਣ ਥਾਰੇ ੱੱਠੇ ਵੀ ਹੋ ਜਾਣ ਗੁਰ ਸਿੱਖ ਜਿਨਾਂ ਜਰਾਪ ਨੇ ਆਪੇ ਸਲੋ ਬੇ ਸ਼ਬਦ ਗੁਰੂ ਉਹ ਨਾਲ ਜਰਾ ਉਹ ਵੀ ਆ ਸਕਦੀ ਮਿਲ ਸਕਦੀ ਆਦਮੀ ਦੇ ਲੈਵਲ ਦੀ ਗੱਲ ਨਹੀਂ ਹੈ ਸਾਫ ਦਰਗਾਹ ਮਿਲਦਾ ਜਿਹੜਾ ਵੈਦਾਂ ਤੋਂ ਮਿਲਦਾ ਨਾ ਉਹ ਤਾਂ ਗਿਆਨ ਹੈ ਉਹ ਤਾਂ ਇਹ ਦੱਸਦਾ ਨਾਮ ਦਾ ਫਾਇਦਾ ਇਹਨੂੰ ਅੰਦਰੋਂ ਹੀ ਮੜੂਗਾ ਅੰਦਰੋਂ ਮੜੇ ਤੇ ਸਾਜਿਵ ਨੂੰ ਨਾ ਬਾਹਰ ਹੋ ਕੇ ਸਾਰੇ ਨਹੀਂ ਦੇ ਸਕਦੇ ਅੰਦਰੋਂ ਤੈਨੂੰ ਵੇਲੇ ਫਿਰ ਗੱਲ ਬਣਨੀ ਸੰਗਤ ਵਿੱਚ ਉਹ ਨਹੀਂ ਮਿਲ ਸਕਦਾ ਆਪਦੇ ਵਿੱਚੋਂ ਮਿਲੂ ਜੇ ਤੇਰੀ ਨਿਮਾਣ ਅਰਦਾਸ ਤੇਰੀ ਜੇ ਤੇਰੀ ਅਰਦਾਸ ਸੁਣੀ ਜਾਊਗੀ ਫੇ ਮਿਲੂਗਾ ਸੱਤ ਸਬਤੋਖ ਹੋਵੇ ਅਰਦਾਸ 700 ਸੱਤ ਬਾਬਲੇ ਪਾਸ ਜੇ ਤੂੰ ਜਾਣ ਫਿਰ ਤੇ ਤੇਰੀ ਅਰਦਾਸ ਵਰਤਿ ਦੀ ਜਾਣੀ ਅਧਿਕਾਰੀ ਬਣ ਅਧਿਕਾਰੀ ਤੈਨੂੰ ਬਣਨਾ ਪਊਗਾ ਸਫਾਰਸ ਤੇ ਜਲਦੀ ਕਿਸੇ ਦੇ ਦੇ ਠੀਕ ਹੈ ਜੀ ਇਹਨਾਂ ਲਿਖਿਆ ਜੀ ਇਹੇ ਭਾਈ ਜਦੋਂ ਵੈਦਾਂ ਗੁਰਮੁਖ ਸੰਤ ਜਨਾਂ ਦਾ ਸੰਗ ਸਾਥ ਇਕੱਠਾ ਹੋਇਆ ਉਦੋਂ ਪ੍ਰਮਾਤਮਾ ਆਪ ਵੈਦਾ ਦੇ ਵਿੱਚ ਆਖ ਖਲੋਤਾ ਵੈਦਾਂ ਦੇ ਵਿੱਚ ਤਾਂ ਪਹਿਲਾਂ ਹੀ ਖਲੋਤਾ ਹੋਇਆ ਗੁਰਮੁਖ ਦੇ ਵੀ ਤਾਂ ਹੀ ਹੋ ਦੇ ਸਕਦਾ ਉਹ ਆਪ ਤੇਰੇ ਜ ਆ ਕੇ ਖਲੋਊਗਾ ਚਲੋ ਵੈਦਾਂ ਜਾ ਖਲੋਤਾ ਫਿਰ ਵੈਦਾਂ ਨੇ ਕੀ ਕੀਤਾ ਵੈਦਾਂ ਸੰਦਾ ਸੰਗ ਇਹਦਾ ਕੀ ਭਾਵ ਹੈ ਜੀ ਫਿਰ ਗੁਰਸੇ ਇਕੱਠੇ ਹੋ ਕੇ ਬਹਿ ਗਏ ਗੁਰਸੇ ਕੋ ਬੈਠੋ ਸਵਾਭਿਚ ਆਏ ਪੰਜ ਪਿਆਰੇ ਆ ਗਏ ਇਕੱਠੇ ਹੋ ਗਏ ਠੀਕ ਹੈ ਜੀ ਆ ਕੇ ਦੇਖਿਆ ਕਿਹਨੇ ਪਰਖ ਰੋਇਆ ਉਹ ਤੇਰਾ ਬੰਦਾ ਆ ਵੀ ਸੰਗਤ ਦੇ ਵਿੱਚ ਆ ਆਪੇ ਖੜ ਜਾਂਦਾ ਜਿਵੇਂ ਖੜ ਜਾਂਦਾ ਕਿੱਥੇ ਸਾਫਤ ਹੋਊਗਾ ਕਿੱਥੋਂ ਸਾਫਤ ਕਰਨਗੇ ਤੇ ਕੌਣ ਮਾਰੀ ਜਾਂਦੇ ਨੇ ਪ੍ਰੈਕਟੀਕਲੀ ਹੋਇਆ ਕਦ ਸਾਹਿਬ ਉੱਥੇ ਰਹੇ ਸੰਗਤ ਹੈ ਬੈਠਾ ਵੀ ਕਿਤੇ ਪਰਮੈਸ਼ਰ ਰਾਜ ਰੋਇਆ ਉੱਥੇ ਖਦਾਈ ਰਾਸ ਵਿੱਚ ਆਪ ਖਲੋਇਆ ਭਾਈ ਆਊਗਾ ਦਸੀਆ ਰਾਜ ਜਾਦਾ ਆਊਗੀ ਜਾਂ ਤੇਰੇ ਅੰਦਰੋਂ ਦੇਊਗਾ ਤੈਨੂੰ ਉਹ ਖਦਰ ਜਿਹਨੂੰ ਦਵਾਈ ਦੇਣੀ ਹੈ ਜਦ ਉਹ ਆਪ ਆ ਕੇ ਦਵਾਈ ਦੇਊਗਾ ਉਹਦਾ ਸਤਗੁਰ ਤੇ ਨਾਮ ਅੰਦਰੋਂ ਠੀਕ ਹੈ ਜਿਵੇਂ ਆਪਾਂ ਕਹਿ ਸਕਦੇ ਨੇ ਵੀ ਗੁਰਬਾਣੀ ਜੋ ਹੈ ਉਹ ਵੈਦਾਂ ਦਾ ਸੰਗ ਹੈ ਜੀ ਗੁਰਬਾਣੀ ਵੈਦਾਂ ਦਾ ਸੰਗ ਹੈ ਜਰੂਰ ਪਰ ਗੁਰਬਾਣੀ ਦਾ ਨਾਮ ਹੈ ਜੀ ਉਹ ਅਖਾਰ ਇਹਨਾਂ ਵਿੱਚ ਨਹੀਂ ਉਹ ਕਮੇਲੇ ਵਿੱਚ ਨਹੀਂ ਅਖਰਾਂ ਦੇ ਵਿੱਚ ਨਹੀਂ ਆ ਉਹ ਕੁਰਬਾਨੀ ਪੈਦਾਂ ਦਾ ਸੰਗ ਜ਼ਰੂਰ ਹੈ ਬਗੇਤ ਹੈ ਨਹੀਂ ਉਹ ਇਹ ਅਖਰ ਖਰਜਾਂਗੇ ਉਹ ਅਖਾਰ ਇਹਨਾਂ ਵਿੱਚ ਨਹੀਂ ਉਹ ਅਖਾਰ ਦਾ ਗਿਆਨ ਹੈ ਇਹਦੇ ਹੈ ਇਹਦੇ ਵਿੱਚ ਚੇਤਨ ਨਹੀਂ ਹੈ ਇਹਦੇ ਵਿੱਚ ਜਿੰਨਾ ਚਿਰ ਸਤਗੁਰ ਆਪਣੇ ਅੰਦਰ ਜਲਮ ਨਹੀਂ ਲੈਤਾ ਤੇਰੇ ਅੰਦਰੋਂ ਉਹਨਾਂ ਚਿਰ ਤੇਰਾ ਮਸਲਾ ਹੱਲ ਨਹੀਂ ਹੁੰਦਾ ਤੇਰੇ ਅੰਦਰ ਸਤਗੁਰ ਦਾ ਜਨਮ ਹੋਣਾ ਸਤਗੁਰ ਕੇ ਜਨਮ ਹੈ ਗਵਨ ਮਟਾਇਆ ਸੁੱਧੀ ਉਹ ਗੱਲ ਹੈ ਫੇਰ ਤੇਰਾ ਆਣਾ ਜਾਣਾ ਜਨਮਾਂ ਕਟਿਆ ਜਾਣਾ ਨਹੀਂ ਘਟਣਾ ਖਲੋਣਾ ਉਹਨੇ ਜਾ ਕੇ ਹੈ ਆਪ ਜਨਮ ਆਪ ਲੈਣਾ ਤੇਰੇ ਅੰਦਰ ਠੀਕ ਕਰਮ ਸੁਕਰਮ ਹੋਏ ਪਸਰਿਆ ਹਰ ਹਾਂ ਦੁੱਖ ਰੋਗ ਸਭ ਪਾਪ ਤਨ ਤੇ ਖਿਸਰਿਆ ਜੋ ਜੋ ਉਹਨਾ ਕਰਮ ਸੁਕਰਮ ਹੋਏ ਪਸਰਿਆ ਜਿਹੜੇ ਜਿਹੜੇ ਉਹਨਾਂ ਨੇ ਕੰਮ ਕੀਤੇ ਉਸ ਕਰਮ ਉਹ ਗੈਰ ਨੂੰ ਨਾ ਪਸਾਰਾ ਹੋਇਆ ਜਿਹੜੇ ਪਾਣੀ ਚ ਚੱਲਦੇ ਨੇ ਕਰਮ ਕਰਦੇ ਨੇ ਪਾਣੀ ਚੱਲ ਕੇ ਉਸ ਵਰਮ ਬਣ ਜਾਂਦੇ ਨੇ ਸੁਕਰਮ ਬਣ ਕੇ ਹੀ ਪਸਾਰਾ ਹੁੰਦਾ ਫਿਰ ਗਿਆਨ ਦਾ ਬ੍ਰਹਮ ਗਿਆਨੀ ਕੇ ਮਨ ਪ੍ਰਗਾਹ ਜੈਸੇ ਤਾਰ ਉੱਪਰ ਆਉਂਦਾ ਹਰਾਂ ਦੁਖ ਰੋਗ ਸਭ ਪਾਪ ਤਾਂ ਤੇ ਕਿਥੇ ਰਿਹਾ ਉਹ ਜਦ ਭਰਮੇ ਨਹੀਂ ਅੰਦਰ ਰਿਹਾ ਦੁਖ ਰੋਗ ਪਾਪ ਸਾਰੇ ਫਿਰਦੇ ਜੋ ਭੱਜ ਗਏ ਜਿੱਥੇ ਵੀ ਹਨੇਰਾ ਆਗਿਆੰਤਾ ਸੀ ਉੱਥੇ ਦੁਖ ਰੋਗ ਪਰਮ ਸੀ ਉੱਥੇ ਔਗਣ ਸੀ ਇੱਥੇ ਔਗਣ ਸੀ ਦੁਖ ਰੋਗ ਪਰਮ ਸੀ ਸੁਖ ਰੋਗ ਪਾਪ ਸੀ ਪਾਪ ਹੁਕਮ ਦਾ ਵਿਰੋਧ ਪਾਪ ਵਿਰੋਧ ਕਾਦੇ ਕਰਕੇ ਸਰ ਸੀ ਆਗਿਆੰਤਾ ਕਰਕੇ ਹਾਂਜੀ ਜਿੱਥੇ ਗਿਆਨ ਹੋ ਗਿਆ ਜਿੱਥੋਂ ਕਰਮ ਤੋਂ ਸੁਖਰਮ ਹੋ ਗਿਆ ਉੱਥੇ ਫੇਰ ਹਨੇਰਾ ਸਮਾਪਤ ਹੋ ਗਿਆ ਤੇ ਪ੍ਰਕਾਸ਼ ਹੋ ਗਿਆ ਆ ਪ੍ਰਕਾਸ਼ ਹੁੰਦਾ ਚੱਲਿਆ ਗਿਆ ਜਾਂ ਪਾਣੀ ਚੱਲਿਆ ਪਰ ਹੁੰਦਾ ਹੀ ਨਾਲ ਹੋ ਗਿਆ ਜਦ ਗੁਰਪ੍ਰਸਾਦ ਪਰਮਕਾ ਦਾ ਨਾਮ ਪਰਮਕਾ ਹੋ ਗਿਆ ਪੂਰੇ ਕਰਕੇ ਹਰ੍ਹਾਂ ਦੁੱਖ ਰੋਗ ਸਭ ਪਾਪ ਤਨ ਤੇ ਖਿਸਰਿਆ ਉਹ ਜੋ ਅੰਦਰ ਪ੍ਰਕਾਸ਼ ਹੋਇਆ ਆਤਮ ਪ੍ਰਕਾਸ਼ ਹੋ ਜਾਂਦਾ ਹੈ ਆਤਮ ਪ੍ਰਕਾਸ਼ ਜੜੇ ਹੂਆ ਠੀਕ ਹੈ ਜੀ ਤੇ ਇੱਥੇ ਹਰ੍ਹਾਂ ਦਾ ਕੀ ਭੰਦਾ ਜੀ ਫਿਰ ਹਰ੍ਹਾਂ ਦੁੱਖ ਰੋਗ ਸਭ ਪਾਪ ਮੇਰੇ ਕਰਤੇ ਵੀ ਹੁੰਦਾ ਉਹ ਗੈਂਦੇ ਕਰਤੇ ਹੁੰਦਾ ਐਸਾ ਬਸਤਾ ਜਾਪੇ ਹੋ ਜਾਂਦਾ ਹੈ। ਸਤਗੁਰ ਦੇ ਜਨਮ ਤੋਂ ਬਾਅਦ ਇਹ ਹੁੰਦਾ ਹੈ। ਅੱਛਾ ਜੀ ਮੈਂ ਤਾਂ ਸਿਰਫ ਦੱਸਿਆ ਸੀ ਬਲਹਾਰੀਆਂ ਜਿਹਨਾਂ ਦੇ ਅੰਦਰੋਂ ਇਹ ਦੁੱਖ, ਰੋਗ ਤੇ ਪਾਪ ਸਾਰੇ ਖਿਸਰ ਗਏ ਹਾਂ ਜੀ। ਹਾਂ ਜੀ ਹਾਂ। ਜਿਹੜੀ ਇੱਥੇ 23 ਮੈਂ ਜੀ ਨਾਲੇ ਜਿਹੜੀ ਰਚਨਾ ਹੈਗੀ ਹੈ ਫਨਹੇ ਮਹੱਲਾ ਪੰਜਵਾਂ ਇਹਦੀ ਵੀ ਨਾਲੇ ਸਮਾਪਤੀ ਹੈ ਇਹ ਤੋਂ ਪਾਤਸ਼ਾਹ ਦੀ ਇੱਕ ਹੋਰ ਰਚਨਾ ਹੈ ਜੀ। ਜੋ ਬੋਲੇ ਮਹੱਲਾ ਪੰਜਵਾਂ ਉਹ ਆਪੇ ਤੋਂ ਬਾਅਦ ਸ਼ੁਰੂ ਕਰਾਂਗੇ ਫਿਰ ਅੰਜ ਠੀਕ ਹੈ